ਇਹ ਸਤਗੁਰਾਂ ਦੇ ਚਰਨਾਂ ਵਿੱਚ ਮੱਥਾ ਟੇਕ ਦਿੱਤਾ। ਇਸ ਤੋਂ ਬਾਅਦ ਵੀ ਇਹ ਮਾਈ ਮਾਲਣ ਆਣ ਕੇ ਸ੍ਰੀ ਭੈਣੀ ਸਾਹਿਬ ਰਹਿ ਕੇ ਜੀਵਨ ਬਤੀਤ ਕੀਤਾ। ਅੱਧ ਸਿਰ ਸੋਨਾ ਫਿਰ ਇੱਕ ਵਾਰੀ ਲਿਆ ਕੇ ਕਿਤੇ ਦੱਬਿਆ ਹੋਇਆ ਚੇਤਾ ਆ ਗਿਆ ਤੇ ਲਿਆ ਕੇ ਸਤਗੁਰਾਂ ਦੇ ਚਰਨਾਂ ਵਿੱਚ ਰੱਖਿਆ। ਇਸ ਮਾਈ ਨੇ ਸੰਸਾਰ ਤੋਂ ਜਾਣ ਲੱਗਿਆਂ ਦਰੋਗਾ ਹੁੰਦਾ ਸੀ ਸੰਤਾ ਸਿੰਘ। ਸੰਤਾ ਸਿੰਘ ਦਰੋਗੇ ਨੂੰ ਆਪਣੇ ਅੰਤ ਸਮੇਂ ਫੇਰ ਦੱਸਿਆ ਸੱਦ ਕੇ ਦੱਸਿਆ ਕਿ ਇਸ ਤਰ੍ਹਾਂ ਕਰਿਓ ਇੱਕ ਸੇਰ ਚਾਂਦੀ ਤੇ 150 ਨਗਦ ਰੁਪਏ ਮੇਰੇ ਚੁੱਲ੍ਹੇ ਦੇ ਪਿੱਛੇ ਦੱਬੇ ਪਏ ਨੇ ਤੇ ਮੇਰੇ ਬਾਦ ਵਿੱਚ ਮੇਥੋਂ ਬਾਦ ਵਿੱਚ ਉਹ ਲਿਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਮੱਥਾ ਟੇਕ ਦੇਣਾ ਇੰਨਾ ਕੁਸ਼ ਕਰਕੇ ਇਹ ਦੋਵੇਂ ਦੰਪਤੀ ਸੰਸਾਰ ਤੋਂ ਗਏ ਐਸੀ ਬਿਰਤੀ ਬਣਾ ਦਿੱਤੀ ਸਤਿਗੁਰੂ ਨੇ ਐਸੀ ਦ੍ਰਿਸ਼ਟੀ ਬਣਾ ਦਿੱਤੀ ਕਿ ਸਭ ਕੁਝ ਅਰਪਿਤ ਕਰ ਦਿੱਤਾ ਸੋ ਮੈਂ ਅਰਜ਼ ਕਰ ਰਿਹਾ ਸਾਂ ਜਿਹੜਾ ਸਤਿਗੁਰ ਕਰ ਜਾਣਿਆ ਜਿਨ੍ਹਾਂ ਨੇ ਸਤਿਗੁਰੂ ਨੂੰ ਪਾਰ ਬ੍ਰਹਮ ਸਮਝ ਲਿਆ ਉਹਨਾਂ ਦਾ ਉਹਨਾਂ ਨੇ ਜੀਵਨ ਸਫਲ ਕਰ ਲਿਆ ਮੈਂ ਅਰਜ਼ ਕੀਤਾ ਸੀ ਕਿ ਬ੍ਰਹਮ ਦੇ ਦੋ ਰੂਪ ਨੇ ਇੱਕ ਹੈ ਪੂਰਨ ਬ੍ਰਹਮ ਇੱਕ ਹੈ ਪਾਰ ਬ੍ਰਹਮ ਪੂਰਨ ਬ੍ਰਹਮ ਹੈ ਰਮੰਤੀ ਰਾਮ ਤੇ ਪਾਰ ਬ੍ਰਹਮ ਹੈ ਪ੍ਰਤੱਖ ਸਤਿਗੁਰੂ ਜੀ ਗੁਰੂ ਨਾਨਕ ਦੇਵ ਜੀ ਨੂੰ ਅਸੀਂ ਪਾਰ ਬ੍ਰਹਮ ਕਹਿ ਸਕਦੇ ਹਾਂ ਗੁਰੂ ਗੋਬਿੰਦ ਸਿੰਘ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਧਾਰੀ ਸਤਿਗੁਰੂ ਦਾ ਨਾਮ ਪਾਰ ਬ੍ਰਹਮ ਹੈ ਇਹਦੇ ਤੇ ਪਰਮਾਨੰਦ ਗੁਰਬਾਣੀ ਵਿੱਚ ਇੱਕ ਥਾਂ ਆਉਂਦਾ ਹੈ ਗੁਰ ਦਾਤਾ ਗੁਰ ਗੁਰ ਸਭ ਮੇ ਰਹਾ ਸਮਾਏ ਗੁਰ ਪਰਮੇਸ਼ਰ ਪਾਰ ਬ੍ਰਹਮ ਗੁਰ ਡੁੱਬਦਾ ਲੈਤਰਾਏ ਗੁਰੂ ਹੀ ਪਾਰ ਬ੍ਰਹਮ ਹੈ ਪਾਰ ਬ੍ਰਹਮ ਪਰਮੇਸ਼ਰ ਸਤਗੁਰ ਸਭ ਨਾ ਕਰਤ ਉਧਾਰਾ ਪਾਰ ਬ੍ਰਹਮ ਸਤਗੁਰ ਨੂੰ ਆਖਿਆ ਫਿਰ ਕਹਿੰਦੇ ਨੇ ਗੁਰ ਕੀ ਮਹਿਮਾ ਕਿਆ ਕਹਾ ਗੁਰ ਵਿਵੇਕ ਸਤ ਸਰ ਇਹ ਆਦ ਉਹ ਆਦ ਜੁਗਾਂ ਦੀ ਜੁਗਹ ਜੁਗ ਪੂਰਾ ਪਰਮੇਸ਼ਰ ਸਤਗੁਰੂ ਹੀ ਪਾਰ ਬ੍ਰਹਮ ਹੈ ਸਤਗੁਰੂ ਹੀ ਪਰਮੇਸ਼ਰ ਹੈ ਫਿਰ ਕਹਿੰਦੇ ਨੇ ਮੈਮਾ ਕਹੀ ਨਾ ਜਾਏ ਗੁਰਸਮਰੱਥ ਦੇਵ ਗੁਰਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲਖ ਅਪੇਵ ਗੁਰਬਾਣੀ ਹੈ ਮੈਂ ਕੋਈ ਇਤਿਹਾਸ ਨਹੀਂ ਦੱਸ ਰਿਹਾ ਗੁਰਬਾਣੀ ਦੇ ਪ੍ਰਮਾਣ ਨੇ ਗੁਰਬਾਣੀ ਵਿੱਚ ਸਤਗੁਰਾਂ ਨੇ ਗੁਰੂ ਨੂੰ ਪਾਰ ਬ੍ਰਹਮ ਮੰਨ ਲਿਆ ਇੱਕ ਪੂਰਨ ਬ੍ਰਹਮ ਹੈ ਇੱਕ ਪਾਰ ਬ੍ਰਹਮ ਹੈ ਪਾਰ ਬ੍ਰਹਮ ਪ੍ਰਗਟ ਹੈ ਤੇ ਧਾਰੀ ਹੈ ਤੇ ਪੂਰਨ ਬ੍ਰਹਮ ਰਮੰਤੀ ਰਾਮ ਹੈ ਨਿਰਗੁਣ ਹੈ ਸੋ ਮੈਂ ਅਰਜ ਕਰ ਰਿਹਾ ਸਾਂ ਜਿਨ੍ਹਾਂ ਨੇ ਐਸਾ ਮੰਨ ਲਿਆ ਉਹਨਾਂ ਦੀ ਦ੍ਰਿਸ਼ਟੀ ਹੋਰ ਹੈ ਤੇ ਜਿਨ੍ਹਾਂ ਨੇ ਕੁਝ ਹੋਰ ਕੁਝ ਮੰਨੇ ਆ ਉਹਨਾਂ ਦੀ ਦ੍ਰਿਸ਼ਟੀ ਹੋਰ ਹੈ ਕਿ ਇੱਕ ਪਾਠ ਆਉਂਦਾ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਉਹ ਸਮਾਂ ਸੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਜਾਂ ਗੁਰੂ ਅਰਜਨ ਦੇਵ ਜੀ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਜਿਹੜੇ ਗੁਰਸਿੱਖ ਛਣ ਸਾਰਾ ਟੋਟਲ ਸਿੱਖ ਸਮਾਜ ਉਹ ਕੀ ਕਰਦਾ ਸੀ ਉਦੋਂ ਗੁਰਬਾਣੀ ਵੀ ਮੌਜੂਦ ਸੀ ਤੇ ਦੇਤਾਰੀ ਵੀ ਮੌਜੂਦ ਸੀ ਗੁਰਬਾਣੀ ਵੀ ਮੌਜੂਦ ਹੈ ਤੇ ਗੁਰੂ ਵੀ ਮੌਜੂਦ ਹੈ ਪੰਜਵੇਂ ਪਾਤਸ਼ਾਹ ਤੋਂ ਲੈ ਕੇ ਸ੍ਰੀ ਗ੍ਰੰਥ ਸਾਹਿਬ ਦੇ ਰੂਪ ਵਿੱਚ ਗੁਰਬਾਣੀ ਦਾ ਸੰਗ੍ਰਹਿ ਕੀਤਾ ਗਿਆ ਪਰ ਇੱਥੇ ਬਸ ਨਹੀਂ ਹੋਈ ਗੁਰੂ ਸਾਹਿਬ ਅੱਗੇ ਵੀ ਆਏ ਗੁਰਬਾਣੀ ਆਪਣੇ ਥਾਂ ਗੁਰੂ ਆਪਣੇ ਥਾਂ ਗੁਰਬਾਣੀ ਨੂੰ ਵੀ ਮੱਥਾ ਟੇਕਦੇ ਸਣ ਪਰ ਪੂਰਾ ਵਿਸ਼ਵਾਸ ਦੇ ਧਾਰੀ ਸਤਿਗੁਰੂ ਤੇ ਆਇਆ ਦਸਵੇਂ ਪਾਤਸ਼ਾਹ ਤੱਕ ਇੱਥੋਂ ਆਣ ਕੇ ਅੱਗੇ ਸ਼ਾਕ ਬਦਲੀਏ ਇਹ ਗੱਲ ਹੋ ਕਥਾ ਹੋਰ ਹੈ ਮੈਂ ਅਰਜ ਕਰ ਰਿਹਾ ਸਾਂ ਉਹਨਾਂ ਉਸ ਸਮੇਂ ਵਿੱਚ ਵੀ ਜਿਨ੍ਹਾਂ ਨੇ ਗੁਰੂ ਨੂੰ ਪਾਰ ਬ੍ਰह्म ਸਮਝ ਲਿਆ ਉਹਨਾਂ ਦੀ ਕਥਾ ਉਹਨਾਂ ਦਾ ਜੀਵਨ ਹੋਰ ਹੈ ਜਿਨ੍ਹਾਂ ਨੇ ਕੁਝ ਹੋਰ ਸਮਝਿਆ ਉਹਨਾਂ ਦਾ ਜੀਵਨ ਹੋਰ ਹੈ ਗੁਰੂ ਪਾਤਸ਼ਾਹ ਕਹਿੰਦੇ ਗੁਰੂ ਅਰਜਨ ਦੇਵ ਕਹਿੰਦੇ ਨੇ ਸਰੀਰ ਵਿਰੋਲ ਸਮੰਗ ਵਰੋਲ ਸਰੀਰ ਹਮ ਦੇਖਿਆ ਇੱਕ ਬਸਤ ਅਨੂਪ ਦਿਖਾਈ ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ ਗੋਬਿੰਦ ਹੀ ਸਤਗੁਰੂ ਹੈ ਸਤਗੁਰੂ ਹੀ ਗੋਬਿੰਦ ਹੈ ਇੰਨਾ ਵਿੱਚ ਜਰਾ ਵੀ ਭੇਦ ਨਹੀਂ ਪਟਾਣੇ ਲਿਖਿਆ ਗੁਰਬਾਣੀ ਵਿੱਚ ਕਹਿੰਦੇ ਨੇ ਸਤਗੁਰੂ ਸਤਗੁਰੂ ਸਤਗੁਰੂ ਗੋਬਿੰਦ ਜੀਓ ਤਿੰਨ ਵਾਰੀ ਆਖਣਾ ਪਿਆ ਉਹ ਗੁਰਮਖੋਜ ਜੋ ਜਿਸ ਨੂੰ ਲੋਕੀ ਗੋਬਿੰਦ ਕਹਿੰਦੇ ਨੇ ਜਿਹਨੂੰ ਅਕਾਲਪੁਰਖ ਕਹਿੰਦੇ ਨੇ ਉਸ ਅਕਾਲ ਪੁਰਖ ਦਾ ਰੂਪ ਉਸ ਗੋਬਿੰਦ ਦਾ ਪ੍ਰਗਟ ਰੂਪ ਸੰਸਾਰ ਵਿੱਚ ਸਤਿਗੁਰੂ ਹੈ ਸਤਿਗੁਰੂ ਹੈ ਸਤਿਗੁਰੂ ਹੈ ਤਿੰਨ ਵਾਰੀ ਆਖਿਆ